ਅਇਤੋ ਕੁਛ ਸਾਲ ਪਹਿਲਾਂ ਤਵਲਜੀ ਨੂੰ ਜਿਹੜੇ ਸੰਗੀਤਕਾਰ ਜਾਂ ਗਾਇਕਕਾਰ ਹੁੰਦੇ ਸਨ ਉਹ ਪਿੱਛੇ ਬਿਠਾਉਂਦੇ ਹੁੰਦੇ ਸੀ ਲੇਕਿਨ ਇਹ ਸਤਗੁਰ ਸੱਚੇ ਪਾਸ਼ਾ ਦੀ ਬਖਸ਼ਿਸ਼ ਹੈ ਕਿ ਸਤਗੁਰਾਂ ਨੇ ਤਵਲਜੀ ਨੂੰ ਵੀ ਉਹਨਾ ਹੀ ਇਕੁਅਲ ਦਰਜਾ ਦਿੱਤਾ ਔਰ ਸਾਡੇ ਖਜਾਨ ਸਿੰਘ ਨੇ ਪ੍ਰਸਿੱਧ ਕਰਕੇ ਖਜਾਨ ਸਿੰਘ ਜੀ ਨੇ ਪ੍ਰਸਿੱਧ ਕਰਕੇ ਦਿਖਾ ਦਿੱਤਾ ਔਰ ਆਪ ਜੀ ਨੇ ਸਾਰਿਆਂ ਨੇ ਦੇਖ ਲਿਆ ਕਿ ਇਹਨਾਂ ਨੇ ਜੋ ਸੋਲੋ ਦੇ ਤਕਰੀਬਨ ਸਾਰੇ ਹੀ ਬੋਲ ਮੈਂ ਹੁਣ ਡਿਟੇਲ ਚ ਨਹੀਂ ਜਾਵਾਂਗਾ ਮੈਂ ਕਿਉਂਕਿ ਜੇ ਫਿਰ ਵੀ ਮੈਨੂੰ 5 ਮਿੰਟ ਹੋਰ ਲੱਗ ਜਾਣੇ ਨੇ ਤੇ ਉਹ ਸਾਰਾ ਕੁਝ ਸੁਣਾ ਦਿੱਤਾ ਬੜੇ ਸ਼ਾਰਟ ਟਾਈਮ 'ਚ ਤੇ ਇਹਨਾਂ ਦਾ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਪਹਿਲਾਂ ਦਿੱਲੀਵਾਜ ਸੁਣਾਇਆ ਉਸ ਤੋਂ ਬਾਅਦ ਤਿੰਨ ਟੁਕੜੇ ਇਹਨਾਂ ਨੇ ਪੰਜਾਬ ਘਰਾਨੇ ਦੇ ਸੁਣਾਏ ਸੋ ਧੰਨਵਾਦ ਕੋਸ਼ਿਸ਼ ਕਰਾਂਗੇ ਤੁਹਾਨੂੰ ਅੱਗੇ ਵਾਸਤੇ ਅੱਗੇ ਕਿਸੇ ਵੇਲੇ ਬਹੁਤ ਟਾਈਮ ਦਿੱਤਾ ਜਾਏਗਾ ਹੁਣ ਅਗਲਾ ਕਾਰਜਕ੍ਰਮ ਸਾਡੇ ਸੰਤ ਸੁਰਜੀਤ ਸਿੰਘ ਜੀ ਸਰੰਗੀ ਤੇ ਪੇਸ਼ ਕਰਨਗੇ ਇਨਾਂ ਦੇ ਨਾਲ ਸੰਗਤ ਕਰਨਗੇ ਸੰਤ ਰਣਬੀਰ ਸਿੰਘ ਜੀ ਢਲਰਬਾ ਤੇ ਸੰਤ ਬਲਬੀਰ ਸਿੰਘ ਜੀ ਤਬਲੇ ਤੇ ਜਿੰਨੇਰੇ ਸਾਥ ਸੈੱਟ ਕਰ ਰਹੇ ਨੇ ਮੈਂ ਇਹਨਾਂ ਬਾਰੇ ਵੀ ਥੋੜੇ ਦੱਸ ਦਿਨਾ ਸੰਤ ਸੁਰਜੀਤ ਸਿੰਘ ਜੀ ਨਾਲ ਦੇ ਨਾਲ ਸੰਤ ਹਰਦੀਪ ਸਿੰਘ ਜੀ ਤਾਨਪੂਰਾ ਤੇ ਆ ਰਹੇ ਨੇ ਸੰਤ ਸੁਰਜੀਤ ਸਿੰਘ ਨੇ ਜੋ ਸਭ ਤੋਂ ਪਹਿਲਾਂ ਸਿੱਖਿਆ ਪ੍ਰਾਪਤ ਕੀਤੀ ਹੈ ਪਹਿਲਾਂ ਤੇ ਸਤਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਹੀ ਇਹਨਾਂ ਨੇ ਸ਼ੁਰੂ ਕੀਤਾ ਨਾ ਉਸ ਤੋਂ ਪ੍ਰੰਤ ਸਾਡੇ ਉਸਤਾਦ ਹਰਪ੍ਰਜਨ ਸਿੰਘ ਜੀ ਸਤਗੁਰ ਦੇਵ ਸਿੰਘ ਜੀ ਜੋ ਸਰੋਤ ਵਾਦ ਖਾਨ ਅਤੇ ਪੰਡਿਤ ਰਾਮ ਨਰਾਇਣ ਜੀ ਜੋ ਬੜੇ ਪ੍ਰਸਿੱਧ ਉਸਤਾਦ ਹਨ ਇਹਨਾਂ ਦੇ ਨਾਲ ਸੰਤ ਰਣਵੀਰ ਸਿੰਘ ਜੀ ਜੋ ਦਿਲਰਬਾਦ ਸੰਗਤ ਕਰ ਰਹੇ ਹਨ ਉਹਨਾਂ ਨੇ ਇਹਨਾਂ ਪਾਸੋਂ ਹੀ ਥੋੜਾ ਬਹੁਤਾ ਸਿੱਖਿਆ ਪ੍ਰਾਪਤ ਕੀਤੀ ਹੈ ਫਿਰ ਇਹਨਾਂ ਦੇ ਜੋ ਗੁਰੂ ਜੀ ਹਨ ਪੰਡਿਤ ਰਾਮ ਨਰਾਇਣ ਜੀ ਉਹਨਾਂ ਪਾਸ ਵੀ ਇਹਨਾਂ ਨੇ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਇਹਨਾਂ ਤੇ ਵੀ અપਾਰ ਕਿਰਪਾ ਹੈ ਤਾਂ ਜੀ ਜਿਨ੍ਹਾਂ ਤੇ ਮੈਂ ਕਹਿੰਦਾ ਨਾ ਆਪਾਰ ਕਿਰਪਾ ਉਹ ਮਤਲਬ ਕਿ ਸੱਚੇ ਪਾਤਸ਼ਾਹ ਜੀ ਨੇ ਆਪ ਵੀ ਸਿੱਖਿਆ ਇਹਨਾਂ ਨੂੰ ਦਿੱਤੀ ਹੋਈ ਹੈ ਸੋ ਸਾਡੇ ਪਾਸ ਅੱਜ ਬਹੁਤ ਹੀ ਗੁਣੀ ਸੱਜਣ ਹਨ ਜੋ ਸੰਤ ਖਜਾਨ ਸਿੰਘ ਜੀ ਹਾਜ਼ਰੀ ਭਰਦੇ ਹੋਏ ਸਾਨੂੰ ਆਪਣੇ ਮਨਹੋਰ ਸੰਗੀਤ ਦੁਆਰਾ ਨਿਹਾਲ ਕਰਾ ਰਹੇ ਨੇ ਜੋ ਹਰਦੀਪ ਸਿੰਘ ਜੀ ਹਨ ਤਾਨਪੁਰਾਤੇ ਵੈਸੇ ਤੇ ਜਿੱਥੇ ਤਾਈ ਮੈਨੂੰ ਪਤਾ ਉਹ ਤਬਲਾ ਸਿੱਖਦੇ ਨੇ ਔਰ ਅੱਛਾ ਵਜਾਉਂਦੇ ਵੀ ਨੇ ਔਰ ਅੱਜ ਇਹਨਾਂ ਨੂੰ ਤਾਨਪੁਰਾਤੇ ਇਹਨਾਂ ਦੇ ਨਾਲ ਸੰਗਤ ਕਰ ਰਹੇ ਨੇ ਚੰਦ ਬਲਬੀਤ ਸਿੰਘ ਜੋ ਤਬਲਾ ਵਾਦਕ ਨੇ ਮਾਨੂੰ ਦੱਸਿਆ ਗਿਆ ਕਿ ਇਹਨਾਂ ਨੇ ਸ਼੍ਰੀ ਚੰਦਰ ਲਾਲ ਜੀ ਤੋਂ ਅਤੇ ਜੋ ਐਸਲੇ ਪੈਣੀ ਸਾਹਿਬ ਸ਼੍ਰੀ ਰਜੇਸ਼ ਮਾਲਵੀਆ ਜੀ ਜੋ ਬਚਨ ਤਬਲਾ ਸਿਖਾ ਰਹੇ ਨੇ ਉਹਨਾਂ ਤੋਂ ਇਹਨਾਂ ਨੇ ਤਬਲੇ ਦੀ ਸਿੱਖਿਆ ਪ੍ਰਾਪਤ ਕੀਤੀ ਹੈ ਜੋ ਵੀ ਸਾਜ਼ ਹੁੰਦੇ ਹਨ ਜੇ ਸੁਰ ਨਾ ਹੋਣ ਤੇ ਉਹਦਾ ਫਿਰ ਆਨੰਦ ਨਹੀਂ ਮਾਨ ਸਕਿਆ ਜਾ ਸਕਦਾ ਸਾਜ਼ ਸੁਰ ਕਰਨ ਤੇ ਥੋੜਾ ਬੋੜਾ ਟਾਈਮ ਲੱਗ ਹੀ ਜਾਂਦਾ ਜਿਸ ਦੌਰਾਨ ਸਾਜ਼ ਟਿਊਨ ਹੋ ਰਹੇ ਨੇ ਮੈਂ ਜੋ ਸੰਤ ਸਰਪੰਨ ਸਿੰਘ ਜੀ ਦੇ ਨਾਲ ਉਸਤਾਦ ਜੀ ਨਾਲ ਪਹਿਲਾਂ ਸੱਜਣ ਬੈਠੇ ਸੀ ਉਹਨਾਂ ਬਾਰੇ ਵੀ ਥੋੜਾ ਥੋੜਾ ਦੱਸ ਹੀ ਦਿਆਂ ਉਸਤਾਦ ਸਰਪੰਨ ਸਿੰਘ ਦੇ ਨਾਲ ਸੰਤ ਸਰਜੀਤ ਸਿੰਘ ਜਿਨ੍ਹਾਂ ਬਾਰੇ ਆਪ ਜੀ ਨੇ ਫੇਰ ਸੁਣ ਲਿਆ ਮੇਰੇ ਕੋਲੋਂ ਸੰਤ ਸਾਡੇ ਸੰਤ ਸਤਵਚਨ ਸਿੰਘ ਜੀ ਜੋ ਸਿਰਫ ਰਾਗ ਵਿਦਿਆ ਚ ਨਹੀਂ ਬਲਕਿ ਗੁਰਬਾਣੀ ਵਿਦਿਆ ਔਰ ਸਾਡੇ ਜੋ ਤਨ ਵਿਦਿਆ ਉਸ ਦੇ ਵਿੱਚ ਵੀ ਭਰਪੂਰ ਹਨ ਸਾਨੂੰ ਬਹੁਤ ਹੀ ਇਤਿਹਾਸ ਸੰਗਤ ਚ ਚੀਜ਼ਾਂ ਦੱਸਦੇ ਹਨ ਉਹਨਾਂ ਦਾ ਰਣਬੀਰ ਸਿੰਘ ਜੀ ਸਨ ਸੰਦਰਿੰਦਰ ਪਾਲ ਸਿੰਘ ਜੀ ਜੋ ਐਸਐਲ ਸੁਖਵਿੰਦਰ ਸਿੰਘ ਜੀ ਪਿੰਕੀ ਉਹਨਾਂ ਦੇ ਸਸ਼ੇਸ਼ ਹਨ ਅਤੇ ਸੰਤ ਧਰਮਪਾਲ ਸਿੰਘ ਜੀ ਇਹਨਾਂ ਸਾਰਿਆਂ ਦਾ ਹੀ ਧੰਨਵਾਦ ਕੀਤਾ ਕਰਦਾ ਹਾਂ ਕਿਉਂਕਿ ਪਹਿਲਾਂ ਮੈਂ ਭੁੱਲ ਗਿਆ ਸੀ ਸੰਤ ਸਰਜੀਤ ਸਿੰਘ ਜੀ